ਸ਼ਲੋਕ ਮਹਲਾ ਪਹਿਲਾ ਦੁਨੀਆਂ ਇੱਕ ਵਖਾਣੀ ਸੁਰਗ ਮਰਤ ਪਿਆਲ ਹੁਕਮ ਨਾ ਮੇਟਿਆ ਜੋ ਲਿਖਿਆ ਸੋ ਨਾਲ ਦੁਨੀਆਂ ਇੱਕ ਵਖਾਣੀ ਐ ਜਿਹੜਾ ਹੁਕਮ ਇੱਕੋ ਹੈ ਇੱਕੋ ਨਾਮ ਹੁਕਮ ਹੈ ਜੇ ਉਹਨੂੰ ਥੋੜੀ ਐ ਤਾਂ ਵਿਆਖਿਆ ਕਰਦੀ ਜਾਈਦੀ ਐ ਵਖਾਣੀ ਐ ਵਿਆਖਿਆ ਜਿਸ ਤਾਰ ਨਾਲ ਵੀ ਚਾਹੀਦਾ ਜੇ ਥੋੜੀ ਵਿਆਖਿਆ ਕਰੀਏ ਜਿਹੜੇ ਕਹਿੰਦੇ ਨੇ ਸੁਣਦੇ ਨਹੀਂ ਵਿਆਖਿਆ ਨਹੀਂ ਕਰਦੇ ਉਹ ਤਾਂ ਫਿਰ ਮੰਨਿਆ ਨਹੀਂ ਜਾ ਸਕਦਾ ਵੀ ਬੋਲ ਸਕਦੇ ਨੇ ਸੁਣੀਆਂ ਸੁਣੀ ਹੈ ਤਾਂ ਉਹਦਾ ਵਿਆਖਣ ਕਰੀਏੁਰਗ ਬਿਰਤ ਤਿਆਰ ਕਿੰਨੇ ਲੋਕਾਂ ਦੀੁਰਗ ਰੋਗ ਦੀ ਬਿਰਤ ਲੋਕ ਪਿਆਰ ਲੋਕ ਦੀ ਇੰਨਾ ਲੋਕਾਂ ਦੀ ਦਾਲ ਦਾ ਕੁਰਬਾਨੀ ਇਹ ਆਨੇ ਸੁਣੀਆਂ ਬਿਨਾ ਕਹਨਾ ਤੋਂ ਉਹਨਾਂ ਨੇ ਤਿੰਨ ਲੋਕ ਦੀ ਕਹਾਣੀ ਕਹੀ ਵੀ ਹੈ ਹਰ ਕੀ ਕਹਾਣੀ ਤਿੰਨ ਲੋਕ ਦੀ ਤਿੰਨ ਲੋਕ ਦੀ ਵਾਤੇ ਚਾਹ ਤਿੰਨ ਲੋਕ ਦੀ ਗੱਲ ਕਹੀ ਹੈ ਗੁਰਬਾਣੀ ਦੇ ਇਹਨਾਂ ਲੋਕਾਂ ਦਾ ਗਿਆਨ ਕਰਾਇਆ ਜਿਹਨਾਂ ਸੁਣੀਆਂ ਉਹ ਨਾ ਜਾਏ ਬੈਠਿਆ ਹੁਕਮ ਨੂੰ ਨਹੀਂ ਜਾ ਸਕਦਾ ਹੁਕਮ ਦਾ ਕੋਈ ਇਲਾਜ ਨਹੀਂ ਸਾਡੇ ਕੋਲ ਕੋਈ ਉਪਾਏ ਨਹੀਂ ਕੀਤਾ ਜਾ ਸਕਦਾ ਬੋੜਿਆ ਨਹੀਂ ਜਾ ਸਕਦਾ ਹੁਕਮ ਨੂੰ ਜੋ ਲਿਖਿਆ ਉਹ ਨਾਲ ਜਿਹੜਾ ਲਿਖਿਆ ਉਹ ਨਾਲ ਜਦਾਈ ਨਾਲ ਦੀ ਨਾਲ ਹੀ ਵਰਤ ਜਾਂਦਾ ਭਾਣਾ ਐਟਲੀ ਕੇਵਲ ਨਾਭੀ ਨਾਲੇ ਹੋ ਜਾਂਦਾ ਅੱਛਾ ਜੀ ਸੁਰਗ ਮਿਰਤ ਪਿਆਲ ਤਿੰਨ ਕੀ ਹੈ ਜੀ ਸੁਰਗ ਲੋਕ ਕਿਹੜਾ ਜਦੋਂ ਮਰ ਸੁਰਗ ਲੋਕ ਜਾਂਦੇ ਅੱਛਾ ਜੀ ਮਿਰਤ ਵਰਤ ਲੋਕ ਹੁਣ ਜਿੱਥੇ ਬੈਠੇ ਆ ਵਰਤ ਮੰਡਲ ਅੱਛਾ ਜੀ ਤੇ ਪਿਆਲ ਕੀ ਹੈ ਜੀ ਇਹ ਆਲ ਦਾ ਘਰ ਅੱਛਾ ਜੀ ਤੇ ਤੁਸੀਂ ਕਿਹ ਜਗ੍ਹਾ ਪਿਆਲ ਨਰਕ ਵੀ ਕਿਹਾ ਸ਼ਾਇਦ ਉਹ ਜਿੱਥੇ ਸੁਣੇ ਆਉਂਦਾ ਹੈ ਸੁਰਗਾ ਮੱਛ ਪਿਆਲ ਹੈ ਉੱਥੇ ਤੁਸੀਂ ਪਾਣੀ 'ਚ ਰਹਿੰਦੇ ਨੇ ਇਹ ਵੀ ਪਾਣੀ 'ਚ ਰਹਿੰਦਾ ਉੱਥੇ ਉੱਥੇ ਵੀ ਸਾਦੀ ਹੁੰਦਾ ਤੇ ਜੀ ਠੀਕ ਹੈ ਇਹ ਦੀ ਗੱਲ ਹੈ ਜੀ ਜੀ ਹੁਕਮ ਨਾ ਜਾਈ ਮੇਟਿਆ ਜੋ ਲਿਖਿਆ ਸੋ ਨਾਲ ਹੁਕਮ ਜੋ ਆਪਾਂ ਲਿਖਿਆ ਉਹ ਹੁਕਮ ਦੇ ਅਨੁਸਾਰ ਉਹੀ ਹੋ ਰਿਹਾ ਜੀ ਹੁਣ ਨਾ ਬੇਟਿਆ ਬੇਕਿਆ ਹੁਕਮ ਨਹੀਂ ਹੈ ਉਪਰ ਮੈਨਸ਼ਰ ਦਾ ਹੁਕਮ ਹੈ ਜੇ ਲੋਕੀਂ ਟਾਉਣਾ ਚਾਹੁੰਦੇ ਆ ਓ ਪਰਮੇਸ਼ਰ ਦਾ ਹੁਕਮ ਆਪਣੇ ਆਪ ਨੂੰ ਸਾਹਮਣੇ ਟਾਉਣਾ ਲਿਖਉਦਾ ਹੈ ਹੁਕਮ ਨੇ ਜਾਈ ਮੱਟਿਆ ਜੋ ਹੁਕਮ ਆਊਗਾ ਮੱਟਿਆ ਦੀ ਜਾ ਸਕਦਾ ਹੁਕਮ ਨੇ ਬੈਂਟਲ ਦੀਆਂ ਗੱਲਾਂ ਕਰਦਾ ਨਾ ਪੁਰਦਾਨ ਕਰਕੇ ਜੋ ਤੇ ਸ਼ੇਰੇ ਪੈਦਾ ਹੋਇਆ ਹੈ ਕਰੋ ਫਪਾਓ ਇਹਦੇ ਚੋ ਪੈਦਾ ਹੋਏ ਜੋਗੀਆਂ ਦਾ ਵੀ ਇਹਦੇ ਤੇ ਹੀ ਹੈ ਜੋਰ ਉਮਰ ਵਧਾ ਲੈਣੀ ਗੁਰਬਾਣੀ ਕਹਿੰਦੀ ਹੁਕਮ ਦੀ ਬੇਟਿਆ ਜਾ ਸਕਦਾ ਨਾਲੇ ਨਾਲ ਵਰਤੀ ਜਾਂਦਾ ਜੋ ਲਿਖਿਆ ਸੁਣਾ ਜਦ ਹੀ ਨਾਲੇ ਦੀ ਮੋਲ ਵਰਤੀ ਜਾਂਦਾ ਜੀ ਕੌਣ ਮੂਆ ਕੌਣ ਮਾਰਸੀ ਕੌਣ ਆਵੇ ਕੌਣ ਜਾਏ ਕੌਣ ਰਹਸੀ ਨਾਨਕਾ ਕਿਸ ਕੀ ਸੁਰਤ ਕੌਣ ਮੂਆ ਮਰਦਾ ਕੌਣ ਹੈ ਤੇ ਕੌਣ ਮਾਰਸੀ ਮਰਦਾ ਕੌਣ ਹੈ ਕੌਣ ਆਵੇ ਜਾਏ ਆਉਣਾ ਜਾਂ ਕੌਣ ਹੈ ਚਾਰ ਸਵਾਲ ਹੋ ਗਏ ਤਿੰਨੇ ਹੋ ਗਏ ਚਲੋ ਕੌਣ ਮੂਆ ਇੱਕ ਸਵਾਲ ਕੌਣ ਮਰਦੀ ਦੋਸਵਾਲ ਕੌਣ ਆਵਾ ਆਵਾ ਕੌਣ ਜਾਏ ਕੌਣ ਜਾਣ ਕੌਣ ਨਾ ਕੌਣ ਰਹਿ ਸੀ ਰੜਕਾ ਕਿਸ ਕੀ ਸੁਰਤ ਸੁਭਾਉ ਰਹਿਣਾ ਕੌਣ ਹੈ ਵਰਦਾ ਕੌਣ ਦੀ ਖੂਨ ਜਾਨ ਤੇ ਕੌਣ ਵਜਦਾ ਕੌਣ ਨੇ ਤੇ ਕਿਸ ਸੁਰਤ ਸੁਭਾਏ ਕਿਹਦੀ ਸੁਰਤ ਸੁਭਾ ਜਾਂਦੀ ਹੈ ਬਸਲ ਬਈ ਸੁਰਤ ਸੁਭਾ ਜਾਂਦੀ ਹੈ ਸ਼ਬਦ ਵਿੱਚ ਕਿਹਦੀ ਸੁਰਤ ਸੁਭਾ ਜਾਂਦੀ ਹੈ ਜਿੱਤੇ ਉਹਦੀ ਸੁਰਤ ਜਾਂਦੀ ਹੈ ਉਹ ਹੁਣ ਜਾਣਦੇ ਬਚਾਂਤ ਪਰ ਕੌਣ ਹੈ ਜਿਹਦੀ ਬਚਦੀ ਹੈ ਕਿਵੇਂ ਸੁਰਤ ਬਚਦੀ ਹੈ ਅਗੇ ਜਵਾਬ ਆਉ ਹੁਣ ਲਾ ਮੈਂ ਅੱਲਾ ਪਹਿਲਾ ਹੋਮ ਹੁਆ ਮੈਂ ਮਾਰਿਆ ਕੌਣ ਵਹ ਦਰਿਆਉ ਕ੍ਰਿਸ਼ਨਾ ਨਾਨਕਾ ਜਾ ਮਨ ਰੱਤਾ ਨਾਹੀਂ ਨਾ ਜਿਹੜਾ ਜਿਹੜਾ ਆਪਣੇ ਆਪ ਨੂੰ ਹੋਮ ਕਹਿੰਦਾ ਸੀ ਹੋਮ ਹੁਆ ਮੈਂ ਮਾਰਿਆ ਮੈਂ ਆਪਣਾ ਮਨ ਆਪੇ ਮਾਰਿਆ ਕਹਿਣ ਦਾ ਮਤਲਬ ਹੈ ਮੈਂ ਆਪਣਾ ਮਨ ਆਪੇ ਮਾਰਿਆ ਆਪਣਾ ਮਨ ਆਪੇ ਸਮਝਾਇਆ ਆ ਮੈਂ ਮਾਰਿਆ ਮੈਂ ਮਾਰਿਆ ਆਪਣੇ ਬੰਦੂ ਆਪੇ ਆ ਮੜਿਆ ਹੁਣ ਚੁੱਪ ਕੀਤਾ ਗੁਰੂ ਦੀ ਬਾਣੀ ਸੁਣਾਈ ਆ ਆ ਹੁਣ ਲਾਜਵਾਬ ਹੋ ਕੇ ਬੈਠਾ ਚੁੱਪ ਕੀਤਾ ਕੌਣ ਵਹਿ ਦਰਿਆਓ ਕੌਣ ਦੀ ਬਾਣੀ ਕੁਰਬਾਨੀ ਉਹ ਦਰਿਆ ਜਿਵੇਂ ਚੱਲਦਾ ਇਹਦੇ ਅੰਦਰ ਦਰਿਆ ਵੋ ਚੱਲਦੀ ਹੈ ਕੌਣ ਠੀਕ ਹੈ ਬੈਠਾ ਗੁਰਖਾ ਜਿੰਨੇ ਮਾਰਿਆ ਜਬ ਤਬ ਮਾਰਿਆ ਮਾਰਾ ਇਹ ਦਰਿਆਵਾਂ ਚ ਡੁੱਬ ਕੇ ਮਰੇ ਪੌਣ ਕੀ ਬਾਣੀ ਦੇ ਹਾਂਜੀ ਪੌਣ ਕੀ ਬਾਣੀ ਗੁਰਬਾਣੀ ਹੈ ਜੀ ਕਿ ਦੂਸਰੀ ਤੁਰਕੀ ਬਾਣੀ ਹੈ ਤੁਰਕੀ ਬਾਣੀ ਦਾ ਹੁੰਦੀ ਰੋਣਾ ਤਾਂ ਗੱਲ ਗੁਰਬਾਣੀ ਹੁੰਦੀ ਹੈ ਕ੍ਰਿਸ਼ਨਾਂ ਥੱਕੀ ਨਾਨਕਾ ਜਾ ਮਨ ਰੱਤਾ ਨਾਏ ਕ੍ਰਿਸ਼ਨਾਂ ਥੱਕੀ ਨਾਨਕਾ ਕ੍ਰਿਸ਼ਨਾਂ ਥੱਕ ਗਈ ਕ੍ਰਿਸ਼ਨਾਂ ਬਲਦ ਹੋ ਗਈ ਨਾਨਕਾ ਜਾ ਮਨ ਰੱਤਾ ਨਾਏ ਜਾ ਦਾ ਰੰਗ ਚੜ ਗਿਆ ਕ੍ਰਿਸ਼ਨਾਂ ਵੀ ਥੱਕ ਗਈ ਉਹ ਵੀ ਛੱਡ ਗਈ ਉਹਦਾ ਵੀ ਰੰਗ ਤ੍ਰਿਸ਼ਮੂ ਦਾ ਵੀ ਰੰਗ ਉੱਟ ਗਿਆ ਹਾਂਜੀ ਲੋਹਣ ਰੱਤੇ ਸਮਾਏ ਜੀਵ ਰਸਾਇਣ ਤੂੰ ਣੜੀ ਲਾਲ ਲਵਾਏ ਲੋਹਣ ਰੱਤੇ ਨੈਣ ਸਮਾਨੇ ਨੈਣ ਮੇ ਜਿਹੜੇ ਨੈਣ ਸੀਨ ਦੇਖਣ ਸ਼ਰਤੀ ਸੀ ਅੱਖਰ ਦੀ ਦੇਖਣ ਜਾਂਦੀ ਪੁੱਠੀ ਮੁੜਕੇ ਜਿਦੋਂ ਸ਼ੱਤੇ ਵਿਕੇ ਸਮਾ ਗਈ ਸ਼ਕਤੀ ਸੀ ਉਹ ਦੇ ਵਿੱਚ ਲੋੜ ਰਤੇ ਲੋੜੀ ਵੀਰੇ ਲੋੜ ਸੀਓ ਦੇ ਵਿਚੇ ਸਮਾ ਗਏ ਲੋੜ ਨ ਰਤੇ ਲੋੜੀ ਇਹਦੇ ਤਰੋ ਮੇਰੇ ਉਹ ਹਰ ਤਬ ਵੀ ਜੋ ਤਰੀ ਦੇ ਵਿਚੇ ਹੀ ਸਮਾ ਆਪਣੇ ਮੂਹਰੇ ਚ ਸਮਾ ਗਏ ਸਮਾਏ ਸੁਰਤ ਇਹ ਨਹੀਂ ਚੱਲਣਾ ਸਮਾ ਗਏ ਚੱਲਣਾ ਸੁਰਤ ਸਮਾਏ ਕੁਰਬਾਨੀ ਜੇਦੀ ਸੁਣੀ ਸੀ ਦਰਿਆ ਮੋ ਜਲਦੀ ਰਹੀ ਸਬਾਨੋ ਤੇ ਮਰਿਆ ਰਹਾ ਕੰਨੀ ਸੁਰਤ ਸੁਭਾਏ ਜੀਵ ਰਸਾਇਣ ਚੁੰਣੀ ਕੀ ਲਾਲ ਲਵਾਏ ਜਿਹੜੀ ਜੀਵ ਹੈ ਅੰਦਲੀ ਜਿਹੜੀ ਮੰਦੀ ਜੀਵ ਸਿੰਘ ਬੋਲਦਾ ਸੀ ਲੋ ਮੰਦੀ ਵਿੱਚ ਜੀਵ ਸੀ ਮਨਮੀ ਕੋਈ ਪ੍ਰਭੂ ਦਾ ਪਹੁੰਚ ਕੋਈ ਗਿਆਨ ਰਸਾਇਣ ਉਹਨੂੰ ਵੀ ਰਸਾਉਣ ਲੱਗ ਗਿਆ ਅੰਦਲੀ ਜੀਵ ਨੂੰ ਵੀ ਰਸਾਉਣ ਲੱਗ ਗਿਆ ਰਕਤੀ ਲਾਲ ਲਵਾਏ ਉਹਦਾ ਵੀ ਸੇਟਾ ਖਿਆ ਗਿਆ ਉਹਨੂੰ ਵੀ ਕੁਝ ਮਿਲ ਗਿਆ ਉਹ ਰੇੜੀ ਉਹ ਖਾਣ ਪੀਣ ਨੂੰ ਭਰ ਗਿਆ ਕੁਛ ਉਹਦੇ ਆਟਾ ਉਹਨੂੰ ਮਿਲ ਗਿਆ ਚੂਨ ਉਹ ਵੀ ਰੱਜ ਲਈ ਖਾ ਖਾ ਕੇ ਉਹ ਵੀ ਰੱਜ ਰਹੀ ਆ ਖਾਦੀ ਨਹੀਂ ਲਾਲ ਰੰਗ ਚੜ ਗਿਆ ਗੁਰਬਾਣੀ ਦਾ ਰੰਗ ਚੜ ਗਿਆ ਸੱਚ ਦਾ ਰੰਗ ਚੜ ਗਿਆ ਇਹ ਇਹ ਵਾਲੂ ਵੀ ਰੰਗ ਚੜ ਗਿਆ ਸੱਚ ਦਾ ਹਾਂਜੀ ਅੰਦਰ ਮੁਸ਼ਕ ਚਕੋਲਿਆ ਕੀਮਤ ਕਹੀ ਨਾ ਜਾਏ ਸੰਦਰਬੋਸ਼ਕ ਚ ਕੋਲਿਆ ਐਸੀ ਅੰਦਰ ਖੁਸ਼ਬੂ ਪੈਦਾ ਹੋਈ ਕਬ ਕਸਤੂਰੀ ਤੋਂ ਹਿੰਦ ਭਲਾ ਦਿੱਤੀ ਲੋ ਪਹਿਲਾਂ ਰਹੀ ਜੋ ਵਹਿੜੀ ਹਿੰਦ ਗਈ ਕਥੂਰੀ ਗੰਧ ਕਸਤੂਰੀ ਜਿਹੜੀ ਹਿੰਦ ਚੜੀ ਸੀ ਨਾ ਹਿੰਦ ਚੜੀ ਹੁਣ ਅਰਥਾ ਦੇ ਅਨਰਥ ਕਰਕੇ ਹਿੰਦ ਨੂੰ ਲਾ ਕੇ ਪਰੇ ਸਟੀ ਹੈ ਬੈਕ ਅੰਦਰ ਸੀ ਉਹ ਕਸਤੂਰੀ ਦੀ ਮਹਿਫਿਲ ਕੀ ਅੰਦਰ ਬੁਕਾਰ ਬਾਹਰ ਕੱਢ ਤੇ ਊੜ ਫਰੇ ਕਬਦ ਬਾਹਰ ਕੜ ਤੇ ਔਗਣ ਬਾਰ ਕੜ ਤੇ ਖੁਸ਼ਬੂ ਫੈਲ ਗਈ ਬਾਆ ਬਾਹਰ ਕੜ ਦੀ ਬਿਖਿਆ ਖੁਸ਼ਬੂ ਫੈਲ ਗਈ ਐਸਾ ਮਸਕ ਐਸੀ ਖੁਸ਼ਬੂ ਆਈ ਕੋ ਨਾ ਜਾਏ ਉਹਦੀ ਕੀਮਤ ਨਹੀਂ ਦੱਸੀ ਜਾ ਸਕਦੀ ਠੀਕ ਹੈ ਇਹ ਸਭ ਤੋਂ ਸ਼ੁਰੂ ਕੰਮ ਹੋਂ ਮੂਆ ਤਾਂ ਹੋਇਆ ਹੈ ਤੋਂ ਪਹਿਲਾਂ ਮੈਂ ਮਾਰਿਆ ਤਾਂ ਹੋਇਆ ਹਾਂ ਮੈਂ ਮਾਰਿਆ ਕੋਈ ਨਹੀਂ ਮਾਰਿਆ ਤਾਂ ਮਰਿਆ ਕੱਠਾ ਹੀ ਹੋ ਗਿਆ ਕੋਈ ਗੱਲ ਹੋ ਤਾਂ اچھا ਮੈਂ ਮੰਨ ਦਾ ਮਰਨਾ ਸੀ ਜੀ ਹਾਂ ਤੇ ਜਦੋਂ ਮਨ ਮਰੇ ਨਾਲੇ ਅੱਛਾ ਤੇ ਜਿਆ ਭਰਮਾਨ फिर ਲਿਆ ਉਹ ਕਿ ਉਹ ਸੋਧੋ ਲਿਆ ਤੇ ਕਿ ਗਲਬੜ ਸੀ ਠੀਕ ਹੈ ਜੀ ਤੇ ਹੋਇਆ ਇਹ ਪੌਣ ਵਹੈ ਦਰਿਆਓ ਜੋ ਗੁਰਬਾਣੀ ਹੋ ਗਿਆ ਹੈ ਇੱਥੇ ਵੀ ਤ੍ਰਿਸ਼ਨਾ ਥੱਕੀ ਨਾਨਕਾ ਜਾ ਮਨ ਰੱਤਾ ਨਾਏ ਸੰਤੋਖ ਜਦੋਂ ਆ ਗਿਆ ਮਨ ਨਾਚ ਰੱਤਿਆ ਗਿਆ ਹੈ ਜੀ ਵਾਹ ਤ੍ਰਿਸ਼ਨਾ ਛੱਡ ਗਈ ਠੀਕ ਹੈ ਫਿਰ ਬਾਕੀ ਜਿਹੜੇ ਹੈ ਇਹ ਗਿਆਨ ਇੰਦਰੀਆਂ ਦੀ ਗੱਲ ਹੋ ਰਹੀ ਹੈ ਜੀ ਲੋਣ ਰੱਤੇ ਲੋਣੀ ਕੰਨੀ ਸੁਰਤ ਸਮਾਏ ਆ ਕੰਨੀ ਸੁਰਤ ਸਮਾਏ ਹੈ ਜੀ। ਸੁਰਤ ਕੰਨਾ ਦੇ ਸਮਾ ਗਈ। ਅਸਨ ਨੂੰ ਚੜਦਾ ਜੀ। ਕੋਲ ਇਸ ਰਤੀ ਲਾਲ ਲਵਾਏ। ਰਸ ਨਾਮਰਾਉਂਗਾ ਨੂੰ ਚੜਦਾ ਰਸ ਅਸਰ ਮੈਂ ਚੜਦਾ ਜੀਪਾਸ ਦਾ। ਤਾਂ ਅੰਦਰ ਜਾਊ। ਕਹੀ ਨਾ ਜਾਏ। ਖੁਸ਼ਬੂ ਵਰਗਾਂ ਲਹਿਰ ਇਹ ਗੱਲ ਹੈ ਬਦਬੂਰੀ ਆ ਕੇ ਗੱਲ ਤੇ ਠੀਕ ਹੈ ਨੀ ਤਿੰਨ ਕੇ ਆਵਤ ਦੁਰਗੰਧ ਵਾਲੀ ਗੱਲ ਹੋਗੀ ਉਹ ਹੁਣ ਚਲੇਗੀ ਹਾਂਜੀ ਹਾਂਜੀ ਠੀਕ ਹੈ ਹੁਣ ਇਹ ਬੇਕੀਮਤੀ ਹੋ ਗਈ ਕੀਮਤ ਕਹੀ ਨਾਮ ਨਿਧਾਨ ਹੈ ਨਾਮੋ ਨਾਲ ਚੱਲੈ ਇਹ ਅਖੁੱਟ ਕਦੇ ਨਾ ਨਿਖਟਈ ਆਏ ਖਰਚਿਓ ਪੱਲੇ ਇਹ ਜੁਗ ਮੈਂ ਨਾਮ ਨਿਧਾਨ ਇਸ ਜੁਗ ਦੇ ਵਿੱਚ ਨਾਮ ਇਹ ਖਜਾਨਾ ਜਿਹੜਾ ਕੋਲ ਰਹਿਣਾ ਆਪਣੇ ਨਾ ਕੋ ਨਾਲ ਚੱਲੇ ਇਹ ਵਾਲਾ ਮੁਕਣ ਵਾਲਾ ਨਹੀਂ ਹੈ ਹੈ ਘਟਦਾ ਨਹੀਂ ਮੁਕਦਾ ਨਹੀਂ ਕਦੇ ਨਾ ਨਖੋਟੇ ਕਦੇ ਨਹੀਂ ਰੁਹਟਦਾ ਹੈ ਘਟਦਾ ਮੁਕਦਾ ਖਾਇ ਖਰਚਿਓ ਬੱਲੇ ਕਾਇਓ ਘਰ ਕੇ ਖੂਬ ਜਨਾਂ ਪੱਲੇ ਐ ਉਹ ਵੀ ਬੁਕੜਾ ਹਰ ਜਨ ਨੇੜ ਨਾ ਆਵਈ ਦੇ ਜਮ ਕੱਤਰੇ ਜਮ ਕੱਲਾ ਦੇੜ ਬਣ ਜਾ ਰਿਆਂ ਜਿਨ ਸੱਚੇ ਬਣ ਜਾ ਬਣ ਜਾ ਰਹੇ ਨੇ ਜਿਨ ਹਰ ਤਨ ਪੱਲੇ ਜਿਨਾਂ ਦੇ ਹਰ ਤਨ ਪੱਲੇ ਹੋਵੇ ਉੱਧਾ हर कृपा ते हर पाई है आप हर कल्है हर कृपा ते हर प्राप्त हुंदा जे हर आप दंदा है कल्दा है ता प्राप्त प्राप अपने आप तो ही अपना ज्ञान पाना है जी हां जी एठे 15वीं पौड़ी समाप्त है जी